ਕਾਰ ਸੰਮਲੇ ਆਏ ਵਜੂ ਲਿਖਾਈ ਕਾਰ ਕਮਾਵੈ ਸਿਰ ਟਣੀ ਲੋਹਾ ਪੱਲੇ ਪਾਈ ਉਹ ਨਹੀਂ ਕਰਿਓ ਹਮਲੇ ਆਏ ਵਜੂ ਲਖਾਈ ਵਾਸ਼ ਕਰੀਆਂ ਕਿਤੇ ਆਦਮੀ ਆਏ ਲਸ਼ਰਾਂ ਦੇ ਲਸ਼ਕਰ ਆਏ ਨੇ ਆਲੇ ਲਿਖਾ ਕੇ ਆਏ ਨੇ ਆਪਣੀ ਆਪਣੀ ਜੋ ਜੋ ਬਿਰਲਾ ਜੋ ਪ੍ਰਾਪਤ ਹੋਣਾ ਦਾਤ ਹੈ ਜੇ ਤਮਕਰਾ ਕਾਣਾ ਪੀੜਾ ਕੇ ਆਏ ਅੱਛਾ ਜੀ ਆਏ ਬਜੂ ਲਖਾਏ ਹੂੰ ਹੂੰ ਇਹਦੇ ਨਾਲ ਕਰੀਏ ਸਭ ਸੰਭਲੇ ਨੇ ਮਤੈ ਟਰਚ ਦੇਾਰੇ ਬਜੂ ਲਖਾ ਕੇ ਆਏ ਨੇ ਆਪਣਾ ਵਜੂ ਤੋਂ ਕੀ ਭਾਵੇਂ ਦਾ ਅੱਛਾ ਜੀ ਕਾਰ ਕਮਾਵੇ ਸਿਰ ਧਣੀ ਲਾਹਾ ਪੱਲੇ ਪਾਏ ਕਾਰ ਕਮਾਵੇ ਜਦ ਤਣੀ ਧਣੀ ਦੀ ਕਾਰ ਸਿਲਤੇ ਹੁਕਮਾਂ ਤੇਲਾ ਹੱਪਲੇ ਪਾਏ ਸੋਰੇ ਹੁਕਮੇ ਵਿੱਚ ਚੱਲਨੇ ਧਣੀ ਕਾਏ ਕਮਾਵੇ ਆ ਜਬੜੀ ਪਰਸਕੋਵੇ ਅਟੋਟਾ ਠੀਕ ਹੈ ਜੀ ਲੋਭ ਬੁਰਾਈਆਂ ਛੋੜੇ ਮਨੋਂ ਵਿਸਾਰ ਗੜ ਦੇਹੀ ਪਾਤਸ਼ਾਹ ਕੀ ਕਦੇ ਨਾ ਅਵਿਹਾਰ ਲੋਭ ਲੋਭ ਬੁਰਾਈਓ ਛੱਡੇ ਮਨੁ ਬਸਾਰ ਜਿਬੰਦੂ ਬਸਾਰ ਕੇ ਛੱਡ ਦੇ ਲੋ ਬਲੋ ਬੁਰਾਈਓ ਨੂੰ ਦੋ ਹੀ ਪਾਤਸ਼ਾਹ ਦੀ ਰੱਖੇ ਕਦੇ ਨਾ ਅਵਿਹਾਰ ਦੀ ਹੈ ਹੂੰ ਹੂੰ ਹੈ ਪਾਤਸ਼ਾਹ ਦੀ ਦੋਹੀ ਹੈ आनी चाकड़ दोई पास ठीक है जी चकर कहिए खसम का सोए सोए उत्तर दे वजो गवाए अपना तख्त ना बैसे सोई चकर कहिए गस सोए उत्तर दे कह दे का हमारा खद चाकन दे ਇਹ ਚਾਹ ਕਰਦੇ ਜਵਾਬ ਕਹ ਲਰਦੇ ਜਵਾਬ ਨਹੀਂ ਕਰ ਸਕਦਾ ਕਿ 7 ਵਜੇ ਨੂੰ ਕਹਿ ਸਕਦਾ ਯਾ ਕਰ ਹੂੰ ਇਹ ਚਾਹ ਕਰੂ ਕਬਨ 7 ਵਜੇ ਸਦਾ ਜਵਾਬ ਨਹੀਂ ਦਿਆ ਅੱਛਾ ਜੀ ਨਾ ਜੀ ਬੁਰਬਾਲੀ ਦੀਆਂ ਜੀ ਆ ਕਾਰ ਇਹ ਕਤਮਾ ਦੀ ਉਤ। ਛੱਕਰ ਕਾ ਰਹਿ ਜਾ। ਹੂੰ। ਉਹ ਉੱਤਰ ਦੇ। ਸਭ ਲਈ ਦਾ ਉੱਤਰ ਦੇ ਤੇ ਜਵਾਬ ਦੇ ਦੇ। ਸਭ ਕਾ ਦੇ ਨੇ ਤੇ ਔਖਾ ਹੁੰਦਾ ਨਹੀਂ। ਠੀਕ ਹੈ। ਡਾਕਟਰ ਬਰੀਅ, ਡਾਕਟਰ ਬਰੀਅ। ਗਵਾਏ ਆਪਣਾ ਤਖਤ ਨਾ ਬੈਸੇ ਸੋਈ ਤੇ। ਉਹ ਬੜਾ ਤਾਂ ਦਾ ਉਹ ਆਲੰਦਰ ਕਟੌਤੀ ਕਰਾ ਲੈਂਦਾ ਜਿਵੇਂ ਲੈ ਦਾ ਅੱਸੀ ਅਗਲੀ ਕੁਰਸੀ ਤੇ ਇਹਨੂੰ ਤਰੱਕੀ ਇਹਦੀ ਕੌਣ ਹੋਣ ਦੇ ਕਰ ਠੀਕ ਹੈ ਹਾਂਜੀ ਇਹ ਤਾਂ ਵਡਿਆਈਆਂ ਜੈ ਭਾਵੇ ਤਾਂ ਆਪ ਕਰੇ ਕਿਸ ਆਖੀਏ ਅਵਰਨਾ ਕੋਈ ਕਰੇ ਪ੍ਰੀਤਮਾਤਮਾ ਦੇ ਅਯੋਧਿਆ ਜੈ ਭਾਵੇ ਦਾ ਦੇ ਜੇ ਆਪ ਕਰੇ ਪ੍ਰੀਤਮ ਹਾਂਜੀ ਉਹ ਯੋਗ ਹਾਂ ਜੈ ਭਾਵੇ ਦਾ ਦੇ ਠੀਕ ਹੈ ਆਪ ਕਰੇ ਕਿਸ ਆਖੀਏ ਅਵਰਨਾ ਕੋਈ ਕਰੇ ਜਿਹਨੂੰ ਆਖੀਏ ਆਪੇ ਕਰਦਾ ਜਿਹੜਾ ਕੋ ਕਰਦਾ ਹੋ ਜਿਹਨੂੰ ਮਰਜ਼ੀ ਵੜਾਈ ਦਵੇ ਜਿਹਨੂੰ ਮਰਜ਼ੀ ਨਾ ਦਵੇ ਠੀਕ ਹੈ ਜੀ ਹੋਰ ਤਾਂ ਕੋਈ ਕਰਦਾ ਅੱਗੇ ਪਿੱਛੇ ਬੁਖਤੀ ਤੇ ਜਿਹੜੀ ਅੱਗੇ ਪਿੱਛੇ ਸੀਟ ਉਹ ਤੇ ਬੰਦਾ ਕੋਈ ਕਰ ਸਕਦਾ ਕਾਬਲੀਅਤ ਉਹ ਦੇਖਦਾ ਕਾਬਲ ਹੋ ਗਏ ਕਰ ਦਿੰਦਾ ਨਾ ਕਾਬਲ ਨੂੰ ਪਿੱਛੇ ਕਰ ਦਿੰਦਾ ਠੀਕ ਹੈ ਜੀ